अंतन पावत देव सर्वे मुन इंद्र महाशिव योग करी भाई अंतन पावत देव सभा पुछिंद्र महाशिव योग करी हां जी योग जोड रहे ने योग साधना ਜੋੜ ਲੈ ਚ ਪੂਰਾ ਕਾਮਯਾਬੀ ਹੋ ਉਸ ਹੋ ਗਿਆ ਜੀ ਕਾਮਯਾਬੀ ਦਾ ਅੰਤ ਨਹੀਂ ਪਾਰ ਹੈ ਹਾਂ ਹਾਂ ਜਿਹੜੀ ਉਹਨਾਂ ਦੀ ਕਲਪਨਾ ਰੁਕਦੀ ਨਹੀਂ ਉਹਦਾ ਅੰਤ ਨਹੀਂ ਕਰ ਸਕਦੇ ਕਰ ਸਕੇ ਦੇ ਵਿਸਾਰੇ ਦੇਵਤੇ ਲੱਗੇ ਨੇ ਹਾਂ ਜੀ ਮੂਨੀ ਲੱਗੇ ਨੇ ਆਪਣੇ ਤਰੀਕੇ ਆਪਣੇ ਤਰੀਕੇ ਤੋਂ puri bhi lagaye haan cheva cheviri de bhag te jehde cheviri de naal jude hoye ne hm kitar devta vi lagaye haan eh sare jodnu di koshish kar rahe ne apne apne tareeke naal koi gyan de marg naal judda hai koi swaddhi de marg ਉੱਤਰ ਜਾਪ ਕਰਕੇ ਜੁੜਦਾ ਹੈ ਹੂੰ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਗੱਲ ਕਰ ਸਕੇ ਹੂੰ ਹੂੰ ਉਤਪੋਰਣਾ ਸਫਲਤਾ ਪ੍ਰਾਪਤ ਕਰ ਲੈ ਜੀ ਹੂੰ ਹੂੰ ਠੀਕ ਹੈ ਜੀ ਜੀ ਪੁੰਨ ਬੇਦ ਵਿਚਾਰੰਗ ਵਿਚਾਰ ਰਹੋ ਹਰ ਜਾਪ ਬੇਦ ਬੇਦ ਬੇਰਾ ਵਿਚਾਰ ਰਹੇ ਹੋ ਵਿਚਾਰ ਰਹੇ ਹੋ ਹਰ ਜਾਪ ਨੂੰ ਛੱਡੋ ਇੱਕ ਘੜੀ ਹੂੰ ਪ੍ਰਗਯ বেদ ਜਿਹੜੇ ਬ੍ਰਹਮਾ ਇਹ বেদ ਪੜ੍ਹ ਕੇ ਵਿਚਾਰ ਕੇ ਇਹ ਕਹਿੰਦਾ ਹੈ ਹਰ ਜਾਪ ਹੈ ਇੱਕ ਘੜੀ ਵਾਰ ਤੇ ਵਿਛੜਣੋ ਨਹੀਂ ਚਾਹੀਦਾ ਇਹ বেদ ਵਿੱਚ ਗੱਲ ਲਿਖੀ ਹੈ ਨਹੀਂ ਆਇਆ ਸਾਥ ਸਾਥ ਸਿਬ੍ਰੋ ਗੋਵਿੰਦ ਹੂੰ ਹੂੰ ਇਹ ਗੁਰਮਤ ਬੇਦਬਤ ਹੈ ਹੂੰ ਹੂੰ ਇਹਲਾ ਬੇਦਬਤ ਨਹੀਂ ਹੈ ਜਿਹੜੇ ਪਹਿਲੀ ਪੰਕਤੀ ਵਾਲੇ ਬੰਦੇ ਨੇ ਇਹਨਾਂ ਕਿਸੇ ਕੋ ਬੇਦਬਤ ਨਹੀਂ ਹੈ ਹੂੰ ਇਹ ਬੇਦਬਤ ਸਾਰੇ ਤਿਆਗੀ ਨੇ ਇਸ ਕਰਕੇ ਇਹਨਾਂ ਦੇ ਕਿਸੇ ਨੇ ਅੰਤ ਨਹੀਂ ਪਾਇਆ ਦੇਵਤੇ ਨੇ ਅੰਤਨਾ ਪਾਵਤ ਦੇਵ ਸਭ ਸਾਰੇ ਦੇਵਤੇ ਬੁਰੀ ਇੱਦਰ ਕੋਈ ਜਵਾਬ ਕਰੀ ਇਹ ਤਾਂ ਨਹੀਂ ਪਾਇਆ ਕਿਉਂਕਿ ਬੇਦ ਜਿਹੜਾ ਇਹਨਾਂ ਦੇ ਬੇਦ ਹੀ ਵਿਚਾਰ त्याਗੀ ਹੋਈ ਹੈ ਹੂੰ ਹੂੰ ਇਹਦੇ ਦੇ ਵਰਗ ਗਿਆਨੀ ਦੇ ਆਤਮ ਗਿਆਨੀ ਦੇ ਹੂੰ ਗਿਆਨ ਹੂੰ ਹੂੰ ਘੜੀ ਵੀ ਵੇਸਨਾ ਕਰੋ ਲਗਾਤਾਰ ਆਤਮ ਗਿਆਨ ਦਾ ਆਤਮ ਆਪਣੇ ਆਪਾ ਚੀਨਣ ਦੀ ਖੋਜ ਵਿੱਚ ਲੱਗੇ ਰਹੇ ਸਮਾਂ ਆਤਮ ਚਿੰਤਨ ਵਿੱਚ ਹੀ ਗੋ ਲਾਉ ਜਿੰਨਾ ਆਤਮ ਚਿੰਤਨ ਹੋ ਰਹੀ ਜਾਂਦਾ ਹਮ ਹੋਰ ਪਾਸੇ ਧਿਆਨ ਨਹੀਂ ਉਹ ਨਜ਼ਰ ਘੱਲਣਾ ਲਾਉਣਾ ਜਿੰਨਾ ਚਿਰ ਆਤਮ ਚਿੰਤਨ ਪੂਰਾ ਨਹੀਂ ਹੋ ਜਾਂਦਾ ਉਹਨਾਂ ਦਾ ਮੰਨਣਾ ਹੈ ਅਕੀ ਗੁਰਬਾਣੀ ਕਹਿੰਦੀ ਹੈ ਸਾਸ ਸਾਸ ਸਿਮਰੋ ਗੋਬਿੰਦ ਹੂੰ ਇਹ ਗੱਲ ਕਹਿੰਦੀ ਹੈ ਬੇਦਵਰਚਾਰੀਓ ਬਸ ਗੁਰਬਾਣੀ ਕਹਿੰਦੀ ਹੂੰ ਇੱਕ ਖੇਲ ਤੇ ਸਭ ਨੂੰ ਜੀਵਣਾ ਫਿਰਥਾ ਜਨਮ ਜਨ ਹੂੰ ਐਗਜ਼ੈਕਟ ਬਿਨ ਮਤੁਰ ਪਰਮਾਤਮਾ ਵੀ ਗਿਆਨ ਹੈ ਹੂੰ ਗੁਰਮ ਸ਼ਬਦਾਰਥ ਵੀ ਗਿਆਨ ਹੈ ਇਹਨੂੰ ਬੇਦ ਕਹਿੰਦੇ ਤੇ ਕਿਸੇ ਵੇਲੇ ਉਹਨੂੰ ਹੁਣ ਗੁਰ ਕਹਿੰਦੇ ਨੇ। ਹੂੰ। ਇਸ ਕਰਕੇ ਗੁਰਮਤ ਔਰ ਬੇਦਮਤ ਸਮਰਥੀ ਲਫ਼ਜ਼ ਨੇ ਦੋਏ। ਇੱਕ ਔਰਤ ਰੱਖ ਦੇਣ ਦੋਏ। ਹਾਂਜੀ। ਇਹਨੂੰ ਕਹਿੰਦੇ ਤੇ ਉਹਨੂੰ ਗੁਰਮਤ ਕਹਿੰਦੇ ਅੱਜ। ਠੀਕ ਹੈ ਜੀ। ਮथुरा ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸਿਖਿ ਮੁਹਾਲ ਕਰੀ ਇਸੇ ਕਰਕੇ ਬਥਰਾ ਜਿਹੜਾ ਹੈ ਜਨ मथुरा ਜਨ ਇਸ ਕਰਕੇ ਆਤਮ ਗਿਆਨੀ ਹੈ ਬਥਰਾ ਜਨ ਕਹਿੰਦੇ ਨੇ ਗਿਆਨ ਸਾਥਿਲ ਕਰ ਲਵੇ ਠੀਕ ਹੈ ਜੀ ਲਵੇ ਜਿਹੜਾ ਬਥਰਾ ਜਨ ਕੋ ਪ੍ਰਭ ਹੈ मथुरा ਜਨ ਦੇ ਪਰਮੇਸ਼ਰ ਦੀ ਕਿਰਪਾ ਹੈ ਠੀਕ ਹੈ ਸੰਗਤ ਸੰਗਤੀ ਸ੍ਰਿਸ਼ਟ ਦਿਹਾਲ ਕਰੀ ਜਿਹੜੇ ਪ੍ਰਭੂ ਨੇ ਉਹ ਪ੍ਰਭੂ ਦੀਂ ਦੇਵਾਲਾ ਕਿਹੜਾ ਪ੍ਰਭੂ ਸਾਰੀ ਸ੍ਰਿਤੀ ਜਿਹੜਾ ਜੁੜ ਜਾਂਦਾ ਹੈ ਸ੍ਰਿਤੀ ਦਾ ਕੋਈ ਵੀ ਜੀਵ ਜਿਹਦਾ ਜੁੜ ਜਾਂਦਾ ਉਹਨੂੰ ਦਿਹਾਲ ਕਰ ਦਿੰਦਾ ਜਿਹੜਾ ਹੂੰ ਹੂੰ ਉਹੀ ਹੈ ਸਾਰੇ ਜਿੰਨੇ ਉਹਦੇ ਨਾਲ ਜੁੜਦੇ ਨੇ ਸਾਰਿਆਂ ਨੂੰ ਦਿਹਾਲ ਕਰ ਦਿੰਦੇ ਮਤਰਾ ਵੀ ਨੇ ਆਲਾ ਹੂੰ ਵਾ ਇੱਕੇ ਕਰਕੇ ਤੇ ਕੁਰਬਾਨੀ ਚਾਹਣ ਕਰਦੇ ਹਨ ਹੂੰ ਹਾਂਜੀ RAMDAS GURU JAGTARAN KO GURJOT ARJAN MAHI DHARI RAMDAS ਦਾ ਸੱਚੇ ਨੂੰ ਜਾਂ ਸਿਆਰੀ ਹੈ ਗੁਰੂ ਦਾ ਸੰਬੰਧ ਗੁਰੂ ਵੱਖਰਾ ਲਫ਼ਜ਼ ਆ ਗਿਆ ਨਾਲਿਆ ਨਾਲ RAMDAS ਦੇ ਨਾਲ ਅਖਰ ਇੱਕ ਸੰਪਾਦਕੀ ਲੱਗੇਗਾ ਨੇ ਜਾਂ ਦੇ ਲੱਗੇਗਾ ਜੀ ਹਾਂ ਕਰਕੇ ਲੱਗੂਗਾ ਇੱਥੇ ਹਾਂ RAMDAS ਦੇ ਗੁਰੂ ਨੇ ਹਾਂ ਜਗਤਾਲਣ ਵਾਸਤੇ ਜਿਹੜੀ ਗੁਰਜੋਤ ਸੀ ਉਹ ਗੁਰਜੋਤ ਦੇਖੋ ਗੁਰਜੋਤ ਲਿਖਿਆ ਹਾਂਜੀ ਗੁਰੂ ਜੋਤਰੀ ਲਿਖਿਆ ਗੁਰੂ ਜੋਤੀ ਦੀ ਲਿਖਿਆ ਇਹ ਕਿਹੜੀ ਗੁਰਜੋਤੀ ਸੀ ਗਿਆਨ ਦੀ ਜੋਤ ਸੀ ਉਹ ਉਹ ਗੁਰਿਆਈ ਸੀ ਗੁਰੂ ਪਦਵੀ ਦਾ ਇਹ ਨਾ ਲੱਗੇ ਦਾ ਇਹ ਪ੍ਰੋਗਰਾਮ ਹੈ ਜੋ ਹੋ ਰਿਹਾ ਹੈ ਦੇ ਪਾੜੀ ਹੋ ਹੂੰ ਨੇ ਤਾਲਣਾ ਆਸੂ ਦਾ ਤਾਂ ਆਗਮੀ ਦਾ ਕੰਮ ਨਹੀਂ ਆਗਮੀ ਤੋਂ ਤਾਂ ਉਹਨੇ ਕੰਮ ਲਿਆ ਹੂੰ ਹੂੰ ਆਗਮੀ ਦਤਾ સેવા ਲਈ ਆਨੇ ਹੂੰ ਹੂੰ ਏ ਹੂੰ ਉਹ ਜਨਮ ਲਾਇਆ ਆਗਮੀ ਦਤਾ ਹੂੰ ਹੂੰ ਰਾਮਦਾਸ ਦੇ ਗੁਰੂ ਨੇ ਜੱਗ ਸਾਰਾ ਤਾਰਨ ਵਾਸਤੇ ਜਿਹੜੀ ਗੁਰਯੋਰ ਸੀ ਗਿਆਨ ਦੀ ਜੋਤ ਸੀ ਹੂੰ ਅਰ ਜਨਮ ਰਾਜ ਦਾਸ ਨੇ ਨਹੀਂ ਕਰੀ ਨੇ ਕਰੀ ਪਰਮਤਮਾ ਕਰੀ ਹੈ ਹੂੰ ਗੁਰ ਤੋਂ ਕੀ ਸੀ ਸ਼ਬਦ ਗੁਰੂ ਉਹ ਜੀ ਪ੍ਰਗਟ ਕਰਦਾ ਹੂੰ ਉਹਦੇ ਵੀ ਤੁਰ ਕੀ ਬਾਣੀ ਹਿਰਦੇ ਚ ਪ੍ਰਗਟ ਕਰਦੀ ਉਹੀ ਗੁਰ ਸੀ ਹੂੰ ਹੂੰ ਉਹਨੂੰ ਵੀ ਸੋੜਣਾ ਉਹਨੂੰ ਵੀ ਬੋਲਣ ਲੱਗਾ ਹੂੰ ਲਓ ਹਿਰਦੇ ਚੋਂ ਬਾਣੀ ਪ੍ਰਗਟ ਹੋਣ ਲੱਗੀ ਹਾਂਜੀ ਜਗ ਔਰ ਨਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਕਿਓ ਜਗ ਔਰ ਨਯਾਹੇ ਬਹੁਤ ਤਮ ਬੈ ਅਵਤਾਰ ਅਵਤਾਰ ਉਜਾਗਰ ਆਣ ਕਿਓ ਹਾਂਜੀ ਮਹਾਕਸ਼ਵਦੇਵ ਕਮੋਗਣ ਜਿੱਤੇ ਖੁਦਗਰਜ਼ੀ ਹੋ ਖੁਦਗਰਜ਼ੀ ਹੋਵੇ ਮਾਇਆ ਦੀ ਭੁੱਖ ਹੋਵੇ ਜਿੱਤੇ ਸਾਰਿਆਂ ਨੂੰ ਹੂੰ ਹੂੰ ਕਿਤੇ અત્યੰਤ ਮਾਇਆ ਦੀ ਭੁੱਖਾ ਲੋਕਾਂ ਦੇ ਵਿੱਚ ਜਦੋਂ ਬਹੁਤ ਜ਼ੋਰ ਹੈ ਤੁਮੋਂ ਕੋਲ ਸ਼ਕਤੀ ਦਾ ਜਦੋਂ ਮਾਇਆ ਦੇ ਪ੍ਰਚਾਰ ਦਾ ਬਹੁਤ ਜ਼ੋਰ ਹੈ ਅਤੇ ਅਤਿੰਤ ਜ਼ੋਰ ਹੈ ਹੂੰ ਹੂੰ ਤੇ ਵਿਰੋਧੀਆਂ ਦਾ ਬਹੁਤ ਤਕੜੇ ਹੋ ਕੇ ਲੱਕ ਵੱਧ ਕੇ ਲੱਗੇ ਨੇ ਉਹਨਾਂ ਦੇ ਖਲਾਫ ਪ੍ਰਚਾਰ ਤੂਗੇ ਪਸੇ ਹੂੰ ਹੂੰ ਨੇ ਬਸ ਪੜਾ ਕੇ ਆਪਣੇ ਨਾਲ ਲੜਾ ਲਿਆ ਗੁਰੂ ਘਰ ਚੋਂ ਲੜਾਈ ਜਾਂਦੇ ਨੇ ਉਹ ਤਕੜੇ ਹੋ ਕੇ ਲੱਗੇ ਹੋਰ ਹੁੰਦੀ ਮਾਤਮ ਤਾਨੇ ਕੇ ਹੀ ਗਈ ਤੁਮੋਂ ਬੜੀ ਤੁਮੋਂ ਬੜੀ ਸ਼ਕਤੀ ਨਾਲ ਪੂਰੀ ਛਿੱਦਤ ਨਾਲ ਲੱਗਿਆ ਆਂ ਵਿਰੋਧ ਕਰ ਉਸੇ ਹੂੰ ਗੁਰਮਤਿ ਪ੍ਰਗਟ ਨਹੀਂ ਹੋਣ ਲੋਕਾਂ ਨੇ ਗੁਰਵਤ ਨਾਲ ਨਹੀਂ ਸਾਦਾ ਪੁੱਛਣਾ ਨਹੀਂ ਉਹ ਜੋ ਪਦਾਰਥਵਾਦੀ ਲੋਕ ਨੇ ਉਹ ਵੀ ਲੱਕਵਾ ਵਿੱਚ ਲੱਗੇ ਕਰਾਹ ਹੂੰ ਠੀਕ ਹੈ ਹਾਂ ਅਵਤਾਰ ਜਾਗਰਾਨ ਕੀ ਉਹਤਾਰ ਹੋ ਜਾਗਰਾਨ ਕੀ ਇੱਕ ਹੋਰ ਅਵਤਾਰ ਹੋ ਜਾਗਰ ਕਰਤਾ 5 ਮਿੰਟ ਪਰਤੇ ਉਧਰ ਉਹ ਲੱਗੇ ਤੇ ਉਧਰ ਪਰਮੇਸ਼ਰ ਲੱਗੇ ਹੋਏ ਉਹ ਕਹਿੰਦਾ ਚੱਲੋ ਅੱਗੇ ਇੱਕ ਭਗਤ ਪੈਦਾ ਹੁੰਦਾ ਸੀ ਜੂਆ ਉਹ ਤਾਂ ਕਦੇ ਹੋਇਆ ਨਹੀਂ ਸੀ ਮੇਰੇ ਇੱਕ ਤਾਂ ਜੂਆ ਹੋ ਗਿਆ ਦੂਜਾ ਥੰਤੀਆ ਹੋ ਗਿਆ ਟੀਆ ਤੋਂ ਚੌਥਾ ਹੋ ਗਿਆ ਚੌਥੇ ਤੋਂ ਤਾਂ ਪੰਜਵਾਂ ਹੋ ਗਿਆ ਹੂੰ ਆਪ ਖੜਾ ਹੈ ਕੂੜਿਆਰੇ ਦੇ ਖਲਾਫ ਹੁੰਦੇ ਨੇ ਹੂੰ ਪ੍ਰਗਟ ਹੁੰਦਾ ਕੂੜਿਆਰੇ ਬੜੇ ਤਕੜੇ ਹੋ ਕੇ ਉਹ ਲਫਰੋ ਹੁੰਦੇ ਨੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਉਹਨਾਂ ਨੂੰ ਉਹਨਾਂ ਦਾ ਕੂੜਾ ਜਿਹੜਾ ਉਹਨਾਂ ਦਾ ਪ੍ਰਚਾਰ ਹੂੰ ਉਹਨਾਂ ਦੇ ਕੂੜਦੇ ਕਲੇ ਢਾਈਡੇ ਨਹੀਂ ਹੋਣ ਲੱਗ ਜਾਂਦੇ ਨੇ ਹੂੰ ਜਦੋਂ ਕੂੜਦੇ ਕਲੇ ਢਾਈਡੇ ਉਹਨਾਂ ਉਹ ਬੜਾ ਹਲ ਨੇ ਹੋਰੇ ਹੋਰ ਬਿਆਨ ਦੇ ਕੇ ਉਲਟ-ਪੁਲਟ ਗੁਬਰਾਹ ਕਰ ਗੁਬਰਾਹਕੋਨ ਪ੍ਰਚਾਰ ਕਰਦੇ ਨੇ ਸੱਚ ਦੇ ਖਿਲਾਫ ਗੁਬਰਾਹਕੋਨ ਪ੍ਰਚਾਰ ਤੇ ਉਤਰਿਆ ਹੂੰ ਵੀ ਸ਼ੁਰੂ ਹੋ ਗਿਆ ਹਾਂ ਖਤਰਾ ਹੋ ਗਿਆ ਨਾ ਨੂੰ ਹੂੰ ਕੋਈ ਗੁੰਮਣਾ ਕੋਈ ਪ੍ਰਚਾਰ ਸ਼ੁਰੂ ਹੋਇਆ ਹੈ ਕੋਟਕ ਦੂਰ ਗਏ ਮਥਰਾ ਨਾਮ ਪਿਓ ਇਨਕੇ ਦੁੱਖ ਕੋਟਕ ਦੂਰ ਦੇ ਤਾਂ ਕਰੋੜਾਂ ਨੇ ਦੁੱਖ ਸੀ ਜਿਹੜੇ ਦੂਰ ਚਲੇ ਗਏ ਹੂੰ ਪਥਰਾ ਪਾਕੇ ਦਾ ਗਵਾ ਮਤਲਬ ਗਵਾਹੀ ਦੇ ਰਿਹਾ ਮਤਲਬ ਕਹਿੰਦਾ ਮੇਰੇ ਸਾਹਮਣੇ ਦੀ ਗੱਲ ਦੇਖ ਰਿਹਾ ਹਾਂ ਕਰੋਨਾ ਗੁਰਮਤਿ ਦਾ ਉਮਰਤ ਜੀ ਦੇ ਪੀ ਲਿਆ ਜਿਹਨੇ ਬੰਨ ਲਈ ਕੁਰਬਾਨੀ ਹਮਮ ਹਜਮ ਕਰ ਲਈਏ ਗੱਲ ਕਰੋਨਾ ਦੁਖ ਦੂਰ ਹੋ ਜਾਂਦੇ ਹਨ ਹਮਮ ਹਾਂ ਅਸਲ ਤੇ ਪਿਤਾ ਆਪਣੇ ਦੂਰ ਹੋਏ ਨੇ ਉਹਦੇ ਹੂੰ ਉਹ ਗੱਦੜ ਇਹਦਾ ਸੀ ਨਾ ਕਹਿੰਦਾ ਝ ਬੀਨੂ ਮਾਰਤਾ ਤਾਂ ਬਾਲੇ ਆ ਜਾਣੀ ਹੂੰ ਫੜਿਆ ਹੋਇਆ ਜੀ ਜੱਟ ਕਹਿੰਦਾ ਬਈ ਤੂੰ ਰੋਜ਼ ਮੇਰਾ ਕਮਾਦ ਖਾਣਾ ਅੱਜ ਤਾਂ ਮਾਰ ਹੀ ਉਹ ਅਗੋਂ ਜੇ ਮੈਨੂੰ ਮਾਰਤਾ ਤਾਂ ਬਾਲੇ ਆ ਜਾਣੀ ਸਾਰੀ ਦੁਨੀਆ ਵਰ ਜਾਣੀ ਜਦੋਂ ਹੋ ਗਿਆ ਕਹਿੰਦਾ ਇਹ ਦੇਖ ਲੈ ਮਾਰ ਕੇ ਹੂੰ ਨੂੰ ਮੇਰੇ ਦੁਬਾਰਾ ਮੇਰੇ ਕਮਾਲ ਨਾ ਖਾ ਭਾਈ ਹੂੰ ਕਹਿੰਦਾ ਤੇਰੀ ਮਰਿਆ ਛੱਡ ਦੇ ਹਾਂ ਕਹਿੰਦਾ ਫੇਰ ਤਾਂ ਨਹੀਂ ਬੜਲੀ ਆਉਂਦੀ ਕਹਿੰਦਾ ਫੇਰ ਨਹੀਂ ਆਉਂਦੀ ਅੱਛਾ ਉਹਨੇ ਛੱਡਦਾ ਉਹ ਪਰੇ ਜਾ ਕੇ ਕਹਣਾ ਵੀ ਝੂਠ ਬੋਲ ਕੇ ਛੁੜ ਗਿਆ ਕਹਿੰਦਾ ਝੂਠ ਨਹੀਂ ਮੈਂ ਬੋਲਿਆ ਹੂੰ ਕਹਣਾ ਵੀ ਤੁੰ ਦਾ ਪੜ ਲਿਆ ਕਹਣਾ ਮੈਂ ਜੱਗ ਮਰ ਕੇ ਪੜ ਲਿਆ ਸੀ ਆਪ ਮਰ ਆਪਣੀ ਗੱਲ ਕਰਦਾ ਆਪ ਮਰਦਾ ਜੱਗ ਪੜ ਲਿਆ ਮੇਰੇ ਭਾਬੀ ਸਾਰੇ ਸਾਰੇ ਮਰ ਗਏ ਇਹ ਮਥਰਾ ਦੇ ਦੁੱਖ ਦੂਰ ਹੋ ਸਾਰਿਆਂ ਕੋਟਕਦੇ ਹੀ ਹੋ ਤਾਂ ਉਹਦੇ ਤਾਂ ਸਾਰਿਆਂ ਦੇ ਹੀ ਹੋ ਕਿੰਨੇ ਨੇ ਪੀ ਲਿਆ ਮਰਦਨਾਮ ਗੁਰਬਾਣੀ ਮੰਨ ਲਈ ਕਿੰਨੇ ਨੇ ਨਹੀਂ ਮੰਨ ਲਈ ਬਥਰੇ ਨੂੰ ਕੀ ਪਤਾ ਇਸ ਦਾ ਹੂੰ ਹੂੰ ਜਿਹੜਾ ਪੀ ਸੁਗਾ ਤੇ ਬੈਠੇ ਨੇ ਸਾਰਿਆਂ ਦੀ ਦੁੱਖ ਦੂਰ ਹੋਈ ਤੇ ਕਰੋੜਾਂ ਹੀ ਕਰੇ ਨੇ ਇਸ ਬਾਣੀ ਦਾ ਇਸ ਵਿਚਾਰਧਾਰਾ ਦਾ ਕਰੋੜਾਂ ਹੀ ਟਰ ਜਾਣਗੇ ਕਰੋੜਾਂ ਹੀ ਟਰ ਰਹੇ ਨੇ ਇਹ ਗੱਲ ਮਥਰਾ ਕਹਿ ਰਹੇ ਹੈ ਹਾਂਜੀ ਇਹ ਪਦਤ ਤੇ ਮਤ ਚੂਕੇ ਰੇ ਮਨ ਭੇਦ ਵਿਪੇਦ ਨਾ ਜਾਣੇ ਜਾਨ ਬਿਓ ਬਿਓ ਇਹ ਪਦਤੀ ਤੇ ਹੂੰ ਪਦਤੀ ਹੈ ਹੂੰ ਇਹ ਵਿਚਾਰ ਧਾਰ ਹੈ ਹੂੰ ਇਹ ਮੇਰੇ ਨਾ ਚੁੱਕ ਜੀ ਕਿਤੇ ਆ ਵੀ ਨਾ ਕੋਈ ਹੋਰ ਕਿਸੇ ਦੀ ਸਿਕਿਉਰਿਟੀ ਦੀ ਗੱਲ ਇਹ ਪદ્ધਤੀ ਤੇ ਕੇ ਸਾਰੇ ਪਾਸ ਹੋਏ ਰੂ ਹੂੰ ਅੱਜ ਦੀ ਟਰ ਸ਼ੁਰੂ ਤੋਂ ਲੈ ਕੇ ਜਦ ਦੀ ਫੇਸੀ ਬਣੀ ਐ ਤੇ ਮੇਰੇ ਕੋਈ ਨਹੀਂ ਟੜਿਆ ਹੋਰ ਹੂੰ ਇਸ ਕਰਕੇ ਪદ્ધਤੀ ਤੋਂ ਆਪਣੇ ਮਨ ਨੂੰ ਕਹਿੰਦਾ ਕਿ ਕਿਹੜੇ ਚੁੱਕ ਜਬੀ ਜੀ ਤੇ ਸਾਡੇ ਇਸ ਮੇਰੇ ਕਤੂ ਦੇ ਵਿੱਚ ਤੇ ਤੇ ਜਣੇ ਸ਼ੰਕਾ ਨਾਲ ਨਹੀਂ ਕਿਤੇ ਤੇ ਹੂੰ ਕੱਟੇ ਨਹੀਂ ਜਾਣੇ ਵੀ ਹੋਰ ਕਿਸੇ ਨਾਲ ਕੱਟੇ ਜਾਣਗੇ ਬਿਲਕੁਲ ਇਹ ਸ਼ੰਕਾ ਦੀ ਕਰ ਲਈ ਉਹ ਰਹਿ ਜੂਗਾ ਵਾਜਾ ਰਹਿ ਜੂਗਾ ਹੂੰ ਹੂੰ ਕੱਟੇ ਜਾਣੇ ਉਹਦੇ ਠੀਕ ਹਾਂ ਤੋਂ ਕੀ ਭਾਅ ਹੁੰਦਾ ਜੀ ਦੇਖੋ ਅੱਛਾ ਜੀ ਠੀਕ ਹੈ ਜੀ ਪਰ ਤਤਸ ਹਿਰਦੈ ਗੁਰ ਅਰਜਣ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਬੀਓ ਬਿਓ ਲਫ਼ਜ਼ ਹੈ ਜਿਹੜਾ ਬਿਓ ਹੂੰ ਉਹ ਦੂਸਰਾ ਹੁੰਦਾ ਹੈ ਦੂਸਰਾ ਪਿਆ ਲਫ਼ਜ਼ ਜਾਣ ਪਿਓ ਦੂਸਰਾ ਕੋਈ ਦੂਸਰਾ ਰਾ ਵੀ ਕੋਈ ਹੈ ਕਿ ਗੱਲ ਕਦੇ ਬੰਨ ਲਵੇਂ ਜਿਵੇਂ ਲੋਕ ਸਾਰੇ ਹੀ ਰਸਤੇ ਸਮੁੰਦਰ ਵੱਲ ਜਾਂਦੇ ਨੇ ਗੱਲ ਝੂਠ ਹੈ ਉਹ ਸਮੁੰਦਰ ਹੈ ਨਹੀਂ ਮੈਂ ਤੁਹਾਨੂੰ ਰਖਦਾ ਜਿੰਨੇ ਰਾਸਤ ਛੱਡ ਕੇ ਸਾਰੇ ਨਰੂਮ ਲੈ ਜਾਂਦੇ ਨੇ ਇਹ ਤਾਂ ਗੱਲ ਹੈ ਸੱਚ ਹੂੰ ਲੈ ਜਾਂਦਾ ਨੇ ਉਹ ਭਗਸਾਦਰ ਦਾ ਸਮੁੰਦਰ ਹੈ ਉੱਥੇ ਨੂੰ ਸਾਰੇ ਪੈ ਗਏ ਜੀ ਸੁਕਸੰਦਰ ਜੀ ਨੂੰ ਜਾਣ ਪਰਸਤ ਹੂੰ ਹੂੰ ਉਹ ਕਹਿੰਦਾ ਭਗਸਾਦਰ ਪੁੱਠੀ ਕੰਡਾ ਉੱਤੇ ਨੂੰ ਚਲਦੀ ਹੈ ਪ੍ਰਕਾਸ਼ ਨੂੰ ਹੂੰ ਹੂੰ ਲੋਕ ਕਹਿੰਦੇ ਸਾਰੇ ਦਰਿਆ ਸੌਂ ਜਾਂਦੇ ਨੇ ਉਹ ਨਰਕ ਨੂੰ ਜਾਣ ਵਾਲੀ ਗੱਲ ਦਾ ਠੀਕ ਹੈ ਉਹਨਾਂ ਦੀ ਉਹ ਜਿਹੜਾ ਸਾਂਝਗਰ ਨੂੰ ਜਾਣ ਵਾਲਾ ਤੇਰੇ ਕੋਈ ਨਹੀਂ ਹਾਂ ਅਹ ਇਹ ਸਤਾਰ ਦੇ ਲੋਕਾਂ ਬਹਿ ਗਏ ਸਾਰੀਆਂ ਮੱਤਾਂ ਦੇ ਨਾਲ ਸਾਰੀਆਂ ਹੀ ਇਹ ਪਾਪ ਸਾਗਰ ਨੂੰ ਹੀ ਲੈ ਕੇ ਜਾਂਦੀਆਂ ਨੇ ਸਾਰੀਆਂ ਠੀਕ ਹੈ ਜੀ ਸਾਗਰ ਨਾਲ ਜੋੜ ਕੇ ਰਹਦੀਆਂ ਨੇ ਪਰ ਤੱਛ ਇਹ ਕਰਕੇ ਕਹਿੰਦਾ ਇਹ ਦੇ ਬੇਦ ਨ ਜਾਣ ਬੀਓ ਕੇ ਸਾਰੀਆਂ ਦੂਜੀ ਬੱਤਾ ਵੀ ਜਾਣਦੀਆਂ ਨੇ ਹੂੰ ਹੂੰ ਦੂਜੀ ਕੋਈ ਮਤਰੀ ਹੈਗੀ ਕੋਈ ਆ ਛੋਟਣ ਕੀ ਵਿਧ ਜਿਹੜੀ ਐ ਨਾ ਕੀ ਵਿਧੀ ਸਭ ਕੋ ਜਾਣਾਂ ਲੋਈਰ ਕਹਿੰਦਾ ਹੂੰ ਹੂੰ ਮਾਇਆ ਦੇ ਵਿੱਚ ਭਵ ਸੰਕਰ ਜੀ ਡੋਬਣ ਵਾਲੀਆਂ ਵਿਧੀਆਂ ਤਾਂ ਸਾਰੇ ਹੀ ਜਾਣਦੇ ਨੇ ਜਿਹਦੀਆਂ ਪਤਾ ਨਾਲ ਸਭ ਫਸਾਉਣ ਵਾਲਿਆਂ ਨੇ 500 GB ਦੀ ਸਭ ਕੋ ਜਾਣੇ ਸ਼ੂਟਣ ਦੀ ਇੱਕ ਸ਼ੂਟਣ ਦੀ ਵੀਡੀਓ ਇੱਕ ਉਹ ਕੋਈ ਉਹਨੂੰ ਕੋਈ ਵੱਲਾ ਜਾਣਦਾ ਆਹੀ ਗੱਲ ਪਟਕਾ ਰਹੇ ਜਿਹੜੇ ਲੋਕ ਇਹ ਪ੍ਰਚਾਰ ਕਰਦੇ ਨੇ ਸਾਰੇ ਧਰ ਮਿਕਰੇ ਹੂੰ ਵਾਹ ਆਜ ਫਸਾਉਣ ਵਾਲੇ ਆਲੇ ਪਾਸੇ ਵਾਲੇ ਨੇ ਉਹ ਸਾਰੇ ਗੱਲ ਠੀਕ ਆ ਉਹਨਾਂ ਦੀ ਮਾਇਆ ਜਿ ਫਰਮਾਇਸ਼ ਬੰਦੇ ਕਹਿੰਦੇ ਨੇ ਉਹਨਾ ਮਾਇਆ ਤੋਂ ਛੁੱਟਿਆ ਹੋਇਆ ਕੋਈ ਵੀ ਇਹ ਗੱਲ ਕਹਿੰਦਾ ਜਿਹੜਾ ਮਾਇਆ ਤੋਂ ਛੁੱਟ ਗਿਆ ਬਤਰਾ ਭਗਤ ਦੀ ਗਵਾਈ ਕੁਝ ਹੋਰ ਹੈ ਹੂੰ ਹੈ ਸੰਸਾਰ ਦੇ ਲੋਕਾਂ ਦੀ ਗੱਲ ਕੁਝ ਹੋਰ ਹੈ ਕਿ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਇਹਨਾਂ ਦੀ ਗੱਲ ਜੋੜੇ ਨਹੀਂ ਹੁੰਦਾ ਕਦੇ ਠੀਕ ਹੈ ਜੀ ਹਾਂਜੀ ਪਰਤਛ ਹਿਰਦਾ ਗੁਰ ਅਰਜਨ ਕੈ ਹਰਪੂਰਨ ਬ੍ਰਹਮ ਨਿਵਾਸ ਲਿਓ ਪਰਤਛ ਹਿਰਦਾ ਗੁਰ ਅਰਜਨ ਕੈ ਗੁਰ ਅਰਜਨ ਕੇ ਆ ਦੇਖੋ ਗੁਰ ਅਰਜਨ ਹਾਂਜੀ ਕੈ ਕੈ ਗੁਰ ਅਰਜਨ ਦੇ ਹਿਰਦੇ ਵਿੱਚ ਹੂੰ ਰੂਪ ਦੇ ਵਿੱਚ ਪੂਰਨ ਬ੍ਰਹਮ ਦਾ ਨਿਵਾਸ ਹੈ ਪੂਰਨ ਬ੍ਰਹਮ ਦੇ ਰੂਪ ਵਿੱਚ ਨਿਵਾਸ ਕਰ ਰਿਹਾ ਹੈ ਹਿਰਦੇ ਵਿੱਚ ਆਪ ਆਰਜਨ ਗੁਰ ਹੂੰ ਪੂਰਨ ਬ੍ਰਹਮ ਆ ਇੱਕ ਵਾਂਨੇ ਇੱਕ ਚਿੱਤ ਹੈ ਇੱਕ ਵਾਂਨੇ ਇੱਕ ਚਿੱਤ ਹੋ ਕੇ ਹਰ ਜਿਹੜਾ ਹਰ ਸੀ ਨਾ ਉਹ ਪੂਰਨ ਬ੍ਰਹਮ ਦੇ ਰੂਪ ਵਿੱਚ ਆ ਹਾਂ ਆ ਕੋਈ ਪੂਰਨ ਬ੍ਰਹਮ ਹੂੰ ਪੂਰਾ ਹੋ ਹੈ ਪੂਰਾ ਭਰਾਵਾ ਹੈ ਪੂਰਾ ਭਰਾਵਾ ਹੈ ਹੀ ਪੂਰਾ ਹੋ ਹੈ ਇਹ ਪੂਰਨ ਬ੍ਰਹਮ ਆਪੇ ਪੂਰਨ ਬ੍ਰਹਮ ਆਪੇ ਪੂਰਾ ਪੂਰਾ ਘੋੜਾ ਆਪੇ ਸਮਝ ਆਈ ਪੂਰਾ ਸਤਿਗੁਰ ਹੈ ਜੇਰੀ ਆਪਾਂ ਆਮ ਗੱਲ ਕਰੀਏ ਉਹ ਬ੍ਰਹਮ ਬ੍ਰਹਮ ਕੀ ਆਪੇ ਬ੍ਰਹਮ ਹੋ ਗਿਆ ਬ੍ਰਹਮ ਦੀ ਤੀਜੀ ਸਟੇਜ ਹੈ ਹੂੰ ਦੂਜੀ ਮੰਨ ਲਓ ਪਹਿਲਾ ਦਾ ਢਾਲ ਸੀ ਤਾਲ ਜਿਹੜੀ ਜਿਹੜਾ ਬਾਹਰ ਚਤ ਵਿੱਚ ਲੀਨ ਹੋ ਗਿਆ ਹੌਲ ਬ੍ਰਮ ਹੋ ਗਿਆ ਹੂੰ ਦੋਇ ਤੇ ਅਕ੍ਰੂਪ ਹੋ ਗਿਆ ਦੋਨਾਂ ਤੇ ਅਕ੍ਰੂਪ ਹੋ ਗਿਆ ਹੂੰ ਹੂੰ ਪਾਸੂ ਢਾਈ ਦਾ ਕਰਦੇ ਸੀ ਹੌਲ ਬ੍ਰਮ ਤੇ ਹੀ ਬਾਹਰ ਠੀਕ ਹੈ ਜੀ ਜਿਹੜੇ ਆਪਾਂ ਪੂਰਨ ਬ੍ਰਹਮ ਦੀ ਗੱਲ ਕਰਦੇ ਆਂ ਅੱਜ ਹੁਣ ਇਹਦੇ 'ਚ ਆਇਆ ਸ਼ਬਦ ਹੈ ਜੀ ਹਰ ਪੂਰਨ ਬ੍ਰਹਮ ਨਿਵਾਸ ਲਿਓ ਬਿਲਕੁਲ ਪੂਰਨ ਬ੍ਰਹਮ ਜੀ ਹਾਂਜੀ ਇੱਥੇ ਪੰਜਵਾਂ ਸੋਈਆ ਸਮਾਪਤ ਹੈ ਜੀ ਹੁਣ ਛੇਵਾਂ ਸ਼ੁਰੂ ਕਰਦੇ ਜੀ ਪ੍ਰਤਾਖ ਦੇਖੋ ਇਹਦੇ ਹਾਂਜੀ ਕਾਹ ਹੈਗਾ ਜੀ ਪੂਰਾ ਹੋ ਕੇ ਹੂੰ ਹੂੰ ਪੂਰਾ ਜਲ ਹੂੰ ਹੂੰ ਆਵੇ ਅਜਨ ਪੂਰਨ ਹੋ ਕੇ ਹੂੰ ਹੂੰ ਹੁਣ ਪਰਮ ਦੇ ਰੂਪ ਚ ਨਿਵਾਸ ਕਰਦਾ ਕਾਇ ਲਾਭ ਹੈ ਕੇ ਉਹਦਾ ਤਾਂ ਜੀ ਹਾਂ ਉਹ ਵੋਕੇ ਠੀਕ ਹੈ ਜੀ ਹਾਂਜੀ ਹੁਣ ਅਗਲਾ ਸੋਈਆ ਸ਼ੁਰੂ ਕਰਦੇ ਹਾਂ ਜੀ ਜਬ ਲੋ ਨਹੀਂ ਬਾਗ ਲੀਲਾਰ ਉਦਾ ਸਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਜਬ ਲੋ ਨਹੀਂ ਬਾਗ ਲੀਲਾਰ ਮੱਥੇ ਦੇ ਉੱਤੇ ਬਾਗ ਜਿਹੜੇ ਲਲਾਟ ਆ ਕੋ ਜਿੰਨਾ ਜਿਹੜੇ ਹਿਰਦੇ ਚ ਗੁਰ ਘਟ ਬਲਿਆ ਨਹੀਂ ਹੂੰ ਘਟ ਬਲਿਆ ਨਾ ਹਾਂਜੀ ਜਿੰਨਾ ਜਿਹੜ ਗੁਰ ਗਿਆਨ ਘਟ ਜੀ ਪ੍ਰਗਟ ਨਹੀਂ ਹੋਇਆ ਬਲਿਆ ਨਹੀਂ ਨਾ ਹੈਗਾ ਜਾਂ ਬਣਦਾ ਫਿਰ ਭਾਗ ਲਲਾਰ ਉਹ ਤੇ ਲਲਾਰ ਲਲਾਰ ਨੂੰ ਲਲਾਰ ਕੇ ਹੈ ਠੀਕ ਗੁਰ ਗਿਆਨ ਘਟ ਜੀ ਬਲਦਾ ਨਹੀਂ ਨਾ ਹੈਗਾ ਉਹਨਾਂ ਜਿਹੜ ਭਾਗ ਲਲਾਰ ਦੀ કહે ਜਾ ਸਕਦੇ ਉਹ ਉਹਦੇ ਹੁੰਦੇ ਹੋਈ ਹੈ ਨਾ ਹਾਂਜੀ ਪ੍ਰਗਟ ਹੋਇਆ ਉਹ ਠੀਕ ਹੈ ਜੀ ਅਬ ਲੋ ਪ੍ਰਭ ਤੇ ਫਿਰ ਤੇ ਬਹੁਤ ਆਇਓ ਹਮਮ ਉਹਨਾਂ ਜਦ ਕਹਿੰਦੇ ਜੀ ਪ੍ਰਭ ਨਾਲ ਸਰਦਾ ਹਾਂਜੀ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਰੇ ਪਛਤਾਇਓ ਅਸੀਂ ਕਹਾਂ ਗੱਲ ਘੋਰ ਸਮੁੰਦਰ ਦੇ ਕਲਪਨਾ ਦੇ ਹੋਏ ਤੇ ਕਲ ਹੁੰਦਾ ਕਲਪਨਾ ਕਲਪਨਾ ਹੁੰਦੀ ਹ ਹ ਹ ਅਸੀਂ ਵੀ ਹੁਕਮ ਦਾ ਵਿਰੋਧ ਕਰਦੇ ਤੇ ਉਹ ਚਾਰ ਦੇ ਲੋਕਾਂ ਨੂੰ ਨਹੀਂ ਲੱਗਦਾ ਔਰ ਕਲਪਨਾ ਦੇ ਸਬੂਤਲ ਡੁੱਬੇ ਹੋਏ ਸੀ ਅਸੀਂ ਬੂੜ ਉੱਤੇ ਹੂੰ ਕਾਬੂ ਹੁੰਕੇ ਰੇ ਪਛਤਾਇਓ ਇਹ ਕਲਪਨਾ ਤੋਂ ਛੁੱਟਦਾ ਹੀ ਨਹੀਂ ਸੀ ਸਾਡਾ ਉਸ ਦਾ ਵਿਰੋਧ ਕਰਨ ਤੋਂ ਖੜਾ ਹੀ ਜਿਹੜਾ ਹੁਕਮ ਸੀ ਉਹਦਾ ਪਾਣੋ ਮਿੱਠਾ ਲੱਗਦਾ ਸੀ ਠੀਕ ਹੈ ਜੀ ਲੱਗਦਾ ਕਿਉਂ ਗਲਪਨਤੀ ਜਾਂਦੀ ਅੰਦਰੋਂ ਕਿਉਂ ਮਾਇਆਤਰੀ ਅੰਦਰੋਂ ਹੂੰ ਇਹ ਪਛਤਾਵਾ ਸੀ ਸਮਾਦੀ ਨਹੀਂ ਸੀ ਲੱਗਦੀ ਹੂੰ ਹੂੰ ਹੁੰਦੀ ਸੀ ਜਦੋਂ ਬਹੁਤ ਕੁਝ ਕਰਕੇ ਦੇਖਿਆ ਸਾਰੇ ਜਦਾਂ ਕਰੇ ਮਾਨੀ ਸੀ ਟਿਕਦਾ ਬਹੁਤ ਆਇਓ ਹੂੰ ਪਰਮੇਸ਼ਰ ਵਿੱਚ ਮਨ ਭਟਕਦਾ ਫਿਰਦਾ ਸੀ ਬਹੁਤ ਹੁੰਦਾ ਸੀ ਲੇਕਿਨ ਨਹੀਂ ਸੀ ਟਿਕਦਾ ਤਤ ਵਿਚਾਰ ਇਹ ਮथुरा ਜਗ ਤਾਰਨ ਕੋ ਅਵਤਾਰ ਬਣਾਇਓ ਅਨੇ ਹੁਣ ਮੈਂ ਤਤ ਤਤ ਦੀ ਗੱਲ ਕਰ ਰਿਹਾ ਵਿਚਾਰ ਕੇ ਹਾਂਜੀ ਮਤਲਬ ਇਹ ਕਹਿੰਦਾ ਤਤ ਵਿਚਾਰ ਜਗ ਤਾਰਨ ਕੋ ਅਵਤਾਰ ਬਣਾਇਓ ਆ ਔਰ ਸਤਿ ਸ਼੍ਰੀ ਅਕਾਲ ਇਹ ਤਾਂ ਜਾਗਰੂਤ ਆਣ ਵਾਸਤੇ ਨੇ ਹੂੰ ਆਪ ਤਾਂ ਧਰੇ ਹੋਏ ਹੁੰਦੇ ਨੇ ਉਹ ਹੂੰ ਹੂੰ ਆ ਜਿਹੜਾ ਬਲੌਂਡ ਆਰ ਜਿਆਦਾ ਹੈ ਜਿਆਦਾ ਬੋਲਦਾ ਹੈ ਹੂੰ ਹੂੰ ਪਹਿਲਾਂ ਮਰਿਆ ਹੋਇਆ ਉਹ ਬੋਲਣ ਲੱਗਦਾ ਨਾ ਕੁਝ ਲੋਕਾਂ ਨੂੰ ਦੱਸਣ ਲੱਗਦਾ ਫਿਰ ਉਹਨੂੰ ਜਿਉਂਦਾ ਬੰਦੇ ਜਾਂਦਾ ਇਹ ਬਤਾਰਦਾ ਉਹ ਮੈਂ ਧਾਰਿਆ ਜਿਹੜਾ ਉਹਨੇ ਧਾਰਿਆ ਨਾ ਨਵਾਂ ਹੂੰ ਹੂੰ ਉਹ ਜਨਮ تمہਾਰੇ ਲੈ ਕੇ ਦੂਜਿਆਂ ਨੂੰ ਠੀਕ ਹੈ ਵਾਸਤੇ ਅਵਤਾਰ ਬਣਾਇਆ ਹੈ ਹੂੰ ਹੂੰ ਕੀਤੇ ਨੇ ਭਗਤ ਹੂੰ ਵਾਸਤੇ ਮੈਗਾ ਕੀਤੇ ਜੀ ਤੱਤ ਦੀ ਗੱਲ ਆਪਣਾ ਮਨ ਕਰੀ ਜਿੱਤੇ ਪੈਦਾ ਕੋਈ ਕਹੇ ਆਪਣੀ ਬੜਿਆਈ ਕਰਾਉਣ ਦਾ ਸੇ ਕੀਤਾ ਨੇ ਇਹ ਤੁਮ ਕੋਲ ਬੜਿਆਈ ਦੀ ਭੁੱਖ ਹੈ ਤੈਨੂੰ ਪੁਗਾਣਾ ਜੈਸਾ ਮਿਲ ਕੇ ਆਖਣ ਪਾਏ ਵੱਡਾ ਫਿਰ ਵੱਡਾ ਹੋ ਜਿੱਦਾ ਹੈ ਉਹ ਤਾਂ ਰਹਿਣਾ ਹੀ ਉਹ ਇਹ ਸਾਰੇ ਕਹਿੰਦੇ ਹੈ ਤਾਂ ਕਿਹੜਾ ਹਰ ਜਿੱਦਾ ਹੈਗਾ ਰਹਿਣਾ ਹੀ ਉਹ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਭਰੇ ਨਾ ਹੋਵੇ ਸੋਗ ਦੱਦਾ ਰਹੇ ਚੁੱਕੇ ਭੋਗ ਹੂੰ ਕੋਈ ਹੋ ਨਹੀਂ ਕੋਈ ਨਾ ਕੋ ਹੋ ਨਾ ਕੋ ਹੈ ਉਹਨੇ ਆਪਣੇ ਵਾਸਤੇ ਕੁਝ ਨਹੀਂ ਕੀਤਾ ਠੀਕ ਹੈ ਜੀ ਕੱਗਤਾਲਣ ਵਾਸਤੇ ਅਵਤਾਰ ਜਿੱਦੇ ਭਗਤ ਫਾਇਦਾ ਕੀਤਾ ਜੀ ਹੂੰ ਹੂੰ ਕੱਗਤਾਲਣ ਕੋ ਅਵਤਾਰ ਬਣਾਇਓ ਠੀਕ ਹੈ ਜੀ ਕਾਏ ਬੁਖਾ ਸਰੀਰ ਦਿੱਤੇ ਨੇ ਪਹਿਲਾਂ ਇਹ ਦੂਏ ਸਰੀਰ ਦਿੱਤੇ ਨੇ ਉਹ ਵੀ ਜਗਤ ਨੂੰ ਉਤਾਰਨ ਵਾਸਤੇ ਭਗਤ ਪਹਿਲਾਂ ਕੀਤੇ ਨੇ ਉਹ ਵੀ ਜਗਤ ਨੂੰ ਕਾਰਨ ਵਾਸਤੇ ਹਾਂ ਤਵਾ ਤੇ ਕੀਤਾ ਹੋਇਆ ਠੀਕ ਹੈ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਜਿਨ ਅਰਜਨ ਅਰਜਨ ਦੇ ਨਾਲ ਦੇਵ ਲੱਗਿਆ ਹਾਂਜੀ ਦੇਵ ਦਾ ਦੇਵਤਾਂ ਦਾ ਵੱਡਾ ਮਹਾਦੇਵ ਹੂੰ ਦੇਵ ਕਹੀਏ ਹੈ ਦੇਵ ਦਾ ਦੇਵ ਤੋਂ ਵੱਡਾ ਦਾ ਮਾਪੇ ਵਾ ਫਿਰ ਹੂੰ ਹੂੰ ਗੁਰੂ ਤੋਂ ਵੱਡਾ ਦਾ ਕੁਛ ਹੁੰਦਾ ਹੀ ਨਹੀਂ ਹੂੰ ਦੇਵ ਨਾਲ ਗੁਰੂ ਨਹੀਂ ਲੱਗਦਾ ਦਾ ਨਹੀਂ ਹੂੰ ਹੂੰ ਦਾ ਜ਼ਰੂਰ ਹੈ ਪਰ ਗੁਰੂ ਦਾ ਬਰਾਬਰ ਨਹੀਂ ਦੇਵ ਕੋਈ ਹੂੰ ਹੂੰ ਮਾਦੇਵ ਦਾ ਸ਼ੁਭੀ ਨਾਮ ਲੱਗਿਆ ਹੂੰ ਹੂੰ ਮਾਦੇਵ ਕੋ ਸਦਾ ਸ਼ੁਭ ਹੂੰ ਇਹ ਗੁਰੂ ਸਦਾ ਸ਼ਿਵ ਹੈ ਹੂੰ ਹੂੰ ਸਦਾ ਸ਼ਿਵ ਹੈ ਹੂੰ ਹੂੰ ਦੇਵ ਜਿਹੜਾ ਹੈਗਾ ਇਤੋਂ ਬੜਾ ਦਾ ਦੇ ਪਿਆ ਇੱਕ ਡਿਗਰੀ ਹੋਰ ਪਈ ਆ ਹੂੰ ਹੂੰ ਆਗਰ ਦਾ ਜੋ ਦੇਵ ਹੈ ਠੀਕ ਹੈ ਜੀ ਇਹ ਵੀ ਵਾਹ ਦੇ ਕਹਿੰਦਾ ਇਹ ਵਾਹ ਦੇ ਕਹਿੰਦਾ ਦਾ ਬੜਾ ਛੋਟਾ ਹੋ ਜਾਂਦੇ ਸੰਸਾਰ ਚ ਭਾਈ ਦੀ ਪਦਵੀ ਆ ਹੂੰ ਹੂੰ ਸਾਰੇ ਜੀ ਜੀ ਹਾਂ ਤੋਂ ਭਾਈ ਸੋ ਮੇਰਾ ਵੀਰ ਐਰਟਮ ਬਰਾਬਰੀ ਹੈ ਬਰਾਬਰੀ ਨਹੀਂ ਹੈ ਉੱਥੇ ਬڑا ਛੋਟਾ ਹੂੰ ਉੱਥੇ ਉਜਨੀ ਦਾ ਤੇ ਸਬਾਬ ਗੁਰਮਤਿ ਦਈ ਹੈ ਹੂੰ ਗੁਰੂਕਾਰ ਜੋ ਜਨੀ ਨਹੀਂ ਹੈ ਇਸ ਕਰਕੇ ਅਰਜਵ ਦੇਵ ਅਰਜਨ ਦੇਵ ਨਹੀਂ ਹੂੰ ਆਜਾ ਦੇਵ ਗੁਰੂ ਦਾ ਵਧਾਰਜਨ ਦੇਵ ਦਾ ਜਿਹੜਾ ਗੁਰੂ ਹੈ ਹੂੰ ਅਰਜਨ ਦੇਵ ਦਾ ਜਿਹੜਾ ਗਿਆਨ ਹੈ ਗੁਰੂ ਹੈ ਜਿਹਨੇ ਉਹਨੂੰ ਜਪ ਲਿਆ ਜਪਨਾ ਪਰਮੇਸ਼ਰ ਨੂੰ ਜਪੀਦਾ ਹੁੰਦਾ ਸ਼ਬਦ ਗੁਰੂ ਨਾਲ ਜੁੜੀਦਾ ਹੁੰਦਾ ਹੂੰ ਹੂੰ ਉਹ ਤੇ ਸਮਾਈਦਾ ਤੇ ਜਪਿਓ ਲਫਜ਼ ਆ ਜਪਿਓ ਜਿਹਨਾਂ ਅਰਜਨ ਦੇਵ ਗੁਰੂ ਯੋਨੇ ਅਰਜਨ ਗੁਰੂ ਅਰਜਨ ਦੇਵ ਗੁਰੂ ਵਾਲਾ ਗਿਆਨ ਸਮਝ ਲਿਆਣ ਲਿਆ ਹੂੰ ਕਰ ਲਿਆ ਹੂੰ ਉਹ ਚਾਨਣ ਉਹ ਰੋਸ਼ਨੀ ਪ੍ਰਾਪਤ ਕਰ ਲਈ ਹੂੰ ਫਿਰ ਝੋਕੜ ਕੇ ਗਰਭ ਨਹੀਂ ਆਇਆ ਠੀਕ ਹੈ ਬਾਸਾਬੂ ਜੋ ਨੇ ਸੰਕਟ ਹੈ ਸੰਕਟ ਕਿੱਥੇ ਗਏ ਸਾਡੀ ਹੂੰ ਅੱਗੇ ਬਾਤਾਂ ਜੋਲੀ ਧਰਦਾ ਹਾਂ ਜੀ ਤੇ ਆਪਾਂ ਇਹ ਗੱਲ ਕਲੀਅਰ ਕਰਤੀ ਨਾ ਜਪਯੋਜਨ ਅਰਜਨ ਦੇਵ ਗੁਰੂ ਜਪਯੋ ਦਾ ਭਾਵ ਹੈਗਾ ਜਿਨ੍ਹਾਂ ਨੇ ਜਾਣਿਆ ਹੈਗਾ ਜਾਣਿਆ ਸਮਿਆ ਤੇ ਅਰਜਨ ਦੇਵ ਜੋ ਅੱਖਰ ਹੈ ਗੁਰੂ ਨਾਲੋਂ ਅਲੱਗ ਹੈ ਅਰਜਨ ਦੇਵ ਦਾ ਗੁਰੂ ਹੋਏਗਾ ਠੀਕ ਹੈ ਨਾ ਜੀ ਹਾਂ ਜੀ ਹਾਂ ਠੀਕ ਹੈ ਜੀ ਕਿਤੇ ਭਲੇਖਾ ਪੈਂਦਾ ਵੀ ਹੋਰ ਨਾ ਅਰਜਨ ਦੇਵ ਧੰਗੁਰ ਅਰਜਨ ਦੇਵ ਕਹਿ ਕੇ ਲੋਕ ਸਮਝਣ ਕੀ ਸ਼ਾਇਦ ਇਹਦੇ ਨਾਲ ਮੁਕਤੀ ਮਿਲ ਜਾਏਗੀ ਨੋ ਨੋ ਨੋ ਨੋ ਇਹ ਜਦੋਂ ਗੁਰਬਾਣੀ ਦੇ ਖਲਾਅ ਹੈ ਤਾਂ ਗੁਰਮੁਖੀ ਇਹਦਾ ਹਰਮਤ ਹੀ ਉਲਟਾ ਇਹ ਤਾਂ ਬਿਅਕਤੀ ਪੂਜਾ ਹੋ ਗਈ ਠੀਕ ਹੈ ਜੀ ਗੁਰੂ ਆਰਜਨ ਦੇਵ ਕਹਿੰਦੇ ਮਨੁੱਖੀ ਦੇ ਇੱਕ ਵਾਰ ਫੀਜਾ ਜਾਣ ਆਪੇ ਕਹਿੰਦੇ ਕੋਈ ਇੱਕ ભગવાન ਹੁਕਮ ਦੀ ਮਿਲਣੀ ਹੈ ਜਿਸਕੇ ਦੀਏ ਰਹੇ ਪੌੜਾ ਦ੍ਰਿਸ਼ਾਂ ਲਾਗੇ ਆਏ ਉਹਨਾਂ ਇਕੋ ਆਰੇ ਰੱਖੇ ਆਪ ਮਾਨਸ ਕੇ ਕੁਛ ਨਹੀਂ ਤੇ ਤਾਂ ਹੱਥੀਏ ਦੇ ਖੇ ਜਾਣੀ ਹੈ ਹੂੰ ਹੂੰ ਉਹਨਾਂ ਦੀ ਆਪਣੀ ਬਾਣੀ ਹੈ ਸੁਖੁੜੀ ਠੀਕ ਹੈ ਜੀ ਉਹਨਾਂ ਨੇ ਆਣ ਦੇ ਕੀ ਕਰਦੀ ਨੇ ਅੰਦੇ ਠੀਕ ਕਰਦੇ ਅਗਰ ਅਗਰ ਬੱਚਾ ਨੇ ਇਹਨੂੰ ਮਾਰਦੀ ਚਾਸ ਨਹੀਂ ਚੜ੍ਹਨੀ ਸੀ ਇੱਕ ਮੱਤੇ ਉਹਦੇ ਆਪਣਾ ਸਾਹਿਬ ਜੀ ਨੇ ਟੀਕੇ ਜੀ ਵੀ ਇਹ ਲਿਖਿਆ ਨਾ ਮੈਂ ਤਾਂ ਹੀ ਪੜ੍ਹ ਕੇ ਆ ਤੁਹਾਨੂੰ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਹੈ ਉਹ ਪਰਤ ਕੇ ਗਰਬ ਜੁੜਨੀ ਦੇ ਦੁੱਖਾਂ ਵਿੱਚ ਨਹੀਂ ਆਇਆ ਤਾਂ ਕਿ ਆਪਾਂ ਇੱਕ ਪੁਆਇੰਟ ਆ ਨਾ ਫਿਰ ਅਰਜਨ ਕਹਿਣਾ ਸੀ ਆ ਇੱਕ ਦੂਜਾ ਕਾਹੇ ਸਬਰੀਏ ਜੰਮੇ ਤੇ ਮਰ ਜਾਏ ਪਰ ਇਹ ਤਾਂ ਕਹਿੰਦੇ ਬਾਣੀ ਦੇ ਤੋਂ ਗਾਇਨ ਨਹੀਂ ਚਲੋ ਹੈ ਨਹੀਂ ਦਾ ਆਦਾ ਹੈ ਮਾਨਸਿਕੀ ਤੇ ਇੱਕ ਵਾਰੀ ਸਭ ਜਾਣਦੇ ਵਣ ਕੋਈ ભગવાન ਹਾਂਜੀ ਠੀਕ ਆ ਜੀ ਇੱਥੇ ਛੇਵਾ ਸਮਾਪਤ ਹੈ ਜੀ ਚਲੋ